मोडभागी ते जान जग सदा सदा हर के गुण गाए बसते तो उससे ही पड़े हैं उससे ही पालो दोबारा रिकॉर्डिंग करता हूं मैं मानु कछु लो वस्तु तर्य। ध्यान सुख सृजनो सिमरो हरि हर लए हर एक आज हरि मन रखो नारक दुख भवन को जाए देखो ਜੇਕਰ ਬ੍ਰਹਮ ਗਿਆਨੀ ਆਪੀ ਹੋਏਗੇ। ਹਲਕੇ ਬ੍ਰਹਮ ਗਿਆਨੀ ਵਿਅਕਤੀ ਹੁੰਦਾ। ਪਰ ਉਹ ਤੇ ਕਹਿੰਦਾ ਬ੍ਰਹਮ ਗਿਆਨੀ ਆਪ ਪਰਮੇਸ਼ਰ। ਪਰਮੇਸ਼ਰ ਵੀ ਬ੍ਰਹਮ ਗਿਆਨੀ ਹੈ। ਹੁਕਮ ਬੁਝਣ ਵਾਲਾ ਵੀ ਬ੍ਰਹਮ ਗਿਆਨੀ ਹੈ। ਜਿਹਦਾ ਹੁਕਮ ਹੈ ਹਾਕਮ ਉਹ ਵੀ ਬ੍ਰਹਮ ਗਿਆਨੀ ਹੈ। ਜਿਹਨੇ ਉਹਨੂੰ ਬੁਝਿਆ ਉਹ ਵੀ ਬ੍ਰਹਮ ਗਿਆਨੀ ਹੈ। ਹੁਕਮ ਬੁਝਿਆ ਜਾਂਦਾ ਮਤਲਬ ਖਾਸ਼ੀ ਗੱਲ ਹੈ ਹੁਕਮ ਬੁਝਿਆ ਜਿਨੇ ਉਹਨੂੰ ਜਾਣ ਲਿਆ ਜਿਨੇ বুঝ ਲਿਆ ਜਦ ਜਾਣਿਆ ਸੋ ਤੇ ਸੀ ਕਿਹਾ ਜਿਨੇ ਜਾਣ ਲਿਆ ਉਹ ਉਹ ਜਿਲੇ ਪ੍ਰਮੇਸ਼ਰ ਵਰਗਾ ਹੀ ਹੈ ਵਰਗਾ ਹੈ ਤੋਂ ਕਿ ਜੇ ਪ੍ਰਮੇਸ਼ਰ ਨੂੰ ਕਾਇਦਾ ਦੇਤਾ ਦੀ ਬਣਾਣ ਵਰਗਾ ਤਾਰਖ ਹੈ ਆਤਮਾ ਦੇ ਲੈਵਲ ਤੇ ਪ੍ਰਮੇਸ਼ਰ ਦੇ ਨਾਲ ਉਹਦੀ ਹੈ ਸ਼ਰੀਰ ਦੇ ਲੈਵਲ ਤੇ ਆ ਕੇ ਪੁੱਛਦਾ ਜਾਂਦਾ ਵੇਰੀ ਬਾਲੀ ਤੇ ਆ ਇਹ ਦੇ ਕਰਕੇ ਪਰਮੇਸ਼ਰ ਹੈ ਨਹੀਂ ਅਸਲੀ ਰਹੀ ਕਰਕੇ ਉਹਦੇ ਵਰਗਾ ਹੀ ਕਰ ਉਹ ਹੀ ਹੈ ਤਾਂਗੇ ਲੋਕ ਮੂਰਤੀ ਨਾ ਬਣਾ ਲੈਣ ਧੋਖਾ ਨਾ ਲੱਗਦੀ ਅੱਖਾਂ ਨੂੰ ਇੱਥੇ ਤਾਂ ਉਹ ਬ੍ਰਹਮ ਗਿਆਨੀ ਨੂੰ ਪਰਮੇਸ਼ਰ ਕਹਿ ਬੈਠੇ ਕਹਨੇ ਪੈਣੋ ਸੀ ਇੱਕ ਸੰਤ ਕਾ ਦੋਖੀ ਸੰਤ ਬ੍ਰਹਮ ਗਿਆਨੀ ਦਾ ਦੋਖੀ ਸੰਤ ਕਾ ਦੋਖੀ ਕੋਈ ਅਲ੍ਹਾ ਸੰਤ ਬ੍ਰਹਮ ਗਿਆਨੀ ਕੋਈ ਨਹੀਂ ਕੋਈ ਅਲ੍ਹਾ ਤਾਂ ਇਹਦੀ ਅਸ਼ਬਦੀ ਚ ਸੰਤ ਨੂੰ ਜਿਹੜਾ ਸੰਤ ਦੀ ਦੱਧਿਆ ਕਰੇ ਆ ਸੰਤ ਦੀ ਵਾਫਤ ਕਰੇ ਐ ਸੰਤ ਜੋ ਕੰਮ ਕਰਦਾ ਉਹ ਜਿਹੜੇ ਅੜਕਾਵੇ ਉਹ ਨੂੰ ਜਿੱਥੇ ਸੱਜਣ ਦੀਆ ਦਰਗਾਹ ਚ ਉਹਦੇ ਬਾਰੇ ਗੱਲ ਕੀਤੀ ਹੋਈ ਕੋਈ ਤੇ ਬਖਸ਼ਾ ਸੰਤ ਦਾ ਇਹ ਜਿਆ ਨਾਲ ਬਣ ਜਵੇ ਸਿੱਖਾਂ ਦੇ ਦਿਮਾਗ ਵਿੱਚ ਸੰਤ ਨੂੰ ਇਹ ਮੰਨਣਾ ਲੱਗ ਜਾਂਦਾ ਬਾਕੀ ਛੱਡ ਜਣਗੇ ਪਰਮੇਸ਼ਰ ਨੂੰ ਛੱਡ ਜਣਗੇ ਈਓ ਨਾ ਇਸ ਸ਼ਲੋਕ ਦੇ ਗੱਲ ਕਹੀ ਹੈ ਤਜੋ ਸਿਆਣ ਨੂੰ ਸੁਣਨੋ ਆਪਣੀ ਸਿਆਣ ਗੁਰੂ ਛੱਡ ਦੋ ਕਹਿੰਦੇ ਗੁਰਮੁਖੀ ਜੀ ਨੇ ਫਰਮਾਇਆ ਜੀ ਬਣਾ ਲਏ ਆਪਣੇ ਬਣੇ ਤੇ ਆਪਣੀ ਸਿਆਣ ਨੂੰ ਛੱਡੀ ਆਪਣੀ ਸਿਆਣ ਛੱਡਣ ਖਾਤਰ ਕਿਹਾ ਸੀ ਗੁਰੂ ਦੀ ਮਤ ਵਰਤੀ ਨਹੀਂ ਜੋ ਕਹੀ ਦੀ ਗੱਲ ਕੋਈ ਜਿਆਦਾ ਕੋਈ ਐ ਕੋਈ ਜੀ ਵਸਡੋ ਆਪਣੀ ਵਸਲੀਅਤ ਆ ਜਿੱਥੇ ਵੀ ਗਿਆਨ ਆਪਣੀ ਵਰਤੀ ਜਾਉ ਉੱਥੇ ਹਨਮਤ ਵੱਡ ਜਾਂਦੀ ਹੈ ਤਾਂ ਜੋ ਗਿਆਨ ਕੋ ਸੁਰਜਣੋ ਗੁਰਸਖਾ ਨੂੰ ਕਹਵੇ ਤੁਸੀਂ ਗਿਆਨ ਬਤਾਇਦਿਓ ਇਹਨਾ ਗੁਰਖਾ ਨਹੀਂ ਦੱਸਣੀ ਇੱਕ ਸੁਰਜਣ ਹੈ ਇੱਕ ਦੁਰਜਨ ਵੀ ਰਹੇ ਜੋ ਉਹ ਨਹੀਂ ਜਿਹੜੇ ਸਾਧਨ ਦੇ ਚੇਲੇ ਨੇ ਜਿਹੜੇ ਗੁਰਸਖਾ ਸਿੱਖ ਨੇ ਜਿਹੜੇ ਮਨੁੱਖ ਤੇ ਦੇਵਤੇ ਬਣ ਗਏ ਸਿੱਧੇ ਰਾ ਚੱਲ ਗਏ ਗੁਰਬਾਣੀ ਤੋਂ ਪੜਨ ਲੱਗ ਗਏ ਜਿਹੜੇ ਗੁਰਬਾਣੀ ਨੂੰ ਵੱਡਣ ਲੱਗ ਗਏ ਜੋ ਕਹਿੰਦੀ ਹੈ ਜਿਨ੍ਹਾਂ ਦੇ ਜੀਵਨ ਚ ਪਰਵਰਤਨ ਆਉਣ ਲੱਗਿਆ ਉਹ ਸੁਰਜਣ ਬਣ ਗਏ ਜਿਹੜੇ ਖਲਾਫਤ ਕਰ ਲਾ ਗਏ ਉਹ ਦਰਜਨ ਬਣ ਗਏ ਬਸ ਬਾਕੀ ਜਿਹੜੇ ਦੂਰੇ ਨੇ ਉਹਦਾ ਸੇਵਾ ਕਰਨ ਵਾਲੇ ਨੇ ਉਹਨਾਂ ਜੋ ਦੁਰਜਨ ਵੀ ਮੰਨ ਸਕਦੇ ਨੇ ਸੁਰਜਨ ਵੀ ਮੰਨ ਸਕਦੇ ਦੋਹਾਂ ਪਾਸਿਆਂ ਦੇ ਵੀ ਨਹੀਂ ਹੁੰਦੇ ਦੋਹਾਂ ਢੜਿਆਂ ਦੇ ਨਹੀਂ ਹੁੰਦੇ ਨਾ ਗੁਰੂ ਕਾ ਮੰਸੀ ਹੋ ਨਾ ਦੂਏ ਢੜੇ ਨਾਲ ਵੀ ਸੀ ਐਸੇ ਵੀ ਸੀ ਸੰਤ ਕੋਹਤ ਦੋਹਾਂ ਨੂੰ ਦੇਖਦੀ ਸੀ ਕਿਹੜਾ ਠੀਕ ਹੈ ਨਾ ਉਹਨਾਂ ਕੋ ਬਚਾਰਾ ਕੋਈ ਬੁੱਧੀ ਹੁੰਦੀ ਐ ਨਾ ਨਾਟਕ ਐ ਉਹ ਜਿਹੜਾ ਸੁਰਜਣਾ ਨੂੰ ਕਿਹਾ ਆ ਵੀ ਤੁਸੀਂ ਆਪਣੀ ਜਾਣਕ ਤੜਕੇ ਕਿਉਂਕਿ ਸੁਰਜਣਾ ਨਹੀਂ ਪ੍ਰਚਾਰ ਕਰਨਾ ਹੁੰਦਾ ਇਹ ਨਾ ਕਿ ਨਿਕਲਣਾ ਹੁੰਦਾ ਤੁਸੀਂ ਸੁਪਰੀ ਪਾਵਨਾਂ ਜੁੜਿਓ ਨਾ ਕਿ ਇਹਨਾਂ ਵਿਅਕਤੀਆਂ ਨਾਲ ਜੁੜਿਓ ਜੇ ਤੋ ਤੁਸੀਂ ਸਿੱਖਿਆ ਵੀ ਲੈ ਲਓ ਜਿੱਤੇ ਵਰਜੀ ਸਿੱਖਿਆ ਦੇ ਦਿੱਤੀਓ ਜਦ ਨਾਲ ਵਰਜੀ ਉਹਦੇ ਕੋ ਗਿਆਨ ਹੋਵੇ ਉਦੋਂ ਤੁਸੀਂ ਕਿਤੇ ਕੋਲ ਬੈਠੇ ਹੋ ਉਹਨੂੰ ਦਾ ਆਇਆ ਹੋਇਆ ਗਿਆਨ ਉਹਦਾ ਆਪਣਾ ਗਿਆਨ ਉਥੇ ਦਾ ਸਟ੍ਰਿਕਟਲੀ ਕੀ ਹੋਇਆ ਲੇਕਿਨ ਇੱਕ ਉਰਖ ਨਹੀਂ ਆ ਦੂਏ ਬਾਬਰ ਨੀਰ ਮਨਰ ਸੰਦੇ ਜਿਹੜੇ ਬੋਤੀ ਪੂਜ ਕਰੇ ਉਹਦੇ ਲਈ ਆ ਰਿਹਾ ਹੋ ਜਾਂਦੀ ਹੈ ਇਹ ਉਹੀ ਹਰਮ ਵਰਗੀ ਤਜੋ ਜ਼ਿਆਨਤ ਉੱਠਣੋ ਜਪੋ ਹਰ ਸਿਮਰੋ ਹਰ ਸ਼ੁਕਰੋ ਹਰ ਰਾਇ ਹਰ ਰਾਇ ਇੱਕ ਤਾਂ ਹਰ ਨੂੰ ਸਭ ਨੂੰ ਪਹਿਲਾਂ ਤਾਂ ਆਪਣੇ ਨੂੰ ਆਪਣੇ ਨੂੰ ਤਰਾਦ ਨੂੰ ਫਿਰ ਜਿਹੜਾ ਉਹਦਾ ਔਰ ਹਰ ਦਾ ਵੀ ਰਾਜਾ ਜਿਹਨੂੰ ਰਾਜਾ ਮੰਨਦਾ ਜਿਹਨੂੰ ਸੰਤ ਬਾ ਜਿਹਨੂੰ ਸੰਤ ਕਹਿੰਦਾ ਇਹ ਸੱਚ ਸਭਨਾ ਕਾ ਖਸਮ ਹੈ ਬੁਲਾਇਆ ਬੋਲ ਲੈ ਖਜ਼ਮ ਕਾ ਉਹ ਤੂੰ ਜ਼ਬਰੋ ਜਿਹੜਾ ਬੁਲਾਇਆ ਆ ਸੁਣਾਓ ਆ ਸੁਣਾਓ ਉਹ ਇਹ ਸੰਤ ਤਾਂ ਕਹੀ ਰਿਹਾ ਬ੍ਰਹਮ ਕੈਣੀ ਤਾਂ ਕਹੀ ਰਿਹਾ ਤੇ ਬੀਤੀ ਤਾਂ ਨੂੰ ਕਹਦਾ ਸਭਾ ਤੁਸੀਂ ਹਟਦੇ ਸੰਤ ਕਹਿ ਰਿਹਾ ਸ਼ਬਦ ਗੁਰੂ ਸੋਤ ਸੋਤ ਤੇ ਸੰਤ ਨੂੰ ਗੁਰੂ ਬਣ ਨਾਨਕ ਦੇ ਗੁਰੂ ਬੋਲਣ ਵਾਲੇ ਗੁਰੂ ਇਹ ਜਿੰਨੇ ਸ਼ੈਤਾਨ ਨੇ ਇਦਾਂ ਹੀ ਕਰਦੇ ਹੁੰਦੇ ਨੇ शैतान वो है जरा अपनी वत बरतले अपनी वत बरत के ये जेडी वरथुर नी शैतान हुंदा। टुट जंदी शैतान हुंदा। टुट शैतान हुंदा। टुट जण दुर्वत भल होता। शरारती हुंदा है। हो। शिव रोज हारा हर राय एक आध हर मन रखो। एक ਮਨ ਰੱਖੋ ਮਨ ਰੱਖੋ ਜਿਹੜੀ ਹਰ ਦੇ ਆਸ ਹੈ ਜਿਤਕੀ ਇੱਛਾ ਰੱਖੋ ਮਨ ਰੱਖੋ ਇਹ ਮਨ ਹਰ ਹਾਂ ਮਨ ਰੱਖੋ ਮਨ ਰੱਖੋ ਹਰ ਕੀ ਜਿਹੜੀ ਇੱਛਾ ਹੈ ਉਹ ਮਨ ਵਿੱਚ ਤਿਆਰ ਕਰੋ ਜਿਹੜੀ ਵਰਗੀ ਇੱਛਾ ਹੈ ਆ ਸੰਸਾਰੀ ਹੈ ਸਥਾਨਕ ਜਿਹੜਾ ਅਨੁਭਵ ਸੱਚਾ ਗੇ ਜਾਂ ਪਿਆਕੇ ਇਹ ਇੱਛਾ ਰੱਖੋ ਜਿਹੜੀ ਹਰ ਦੇ ਮਨ ਦੇ ਵਿੱਚ ਇੱਛਾ ਹੈ ਉਹ ਰੱਖੋ ਜੋ ਆਇਆ ਸੀ ਪ੍ਰਾਣੀ ਤੋਂ ਆਇਓ ਲਾਹ ਲੈਣ ਲਾਹ ਲੈਣਾ ਸੀ ਉਹ ਲਾਹ ਲੈ ਲੋ ਉਹ ਕਹਿੰਦਾ ਨਾਨਕ ਦੁਖ ਭਰਮ ਭੋ ਜਾਏ ਇਹ ਸਹੀ ਕਹਿੰਦਾ ਤੁਹਾਡੇ ਅੰਦਰ ਨਾ ਕੋਈ ਦੁੱਖ ਰਹੂਗਾ ਨਾ ਪਰਭਰ ਰਹੂਗੀ ਨਾ ਭੋਗ ਪੈ ਰਹੂਗਾ ਪਰਮਾ ਜਿੰਨਾ ਚਿਰ ਪਰਮਾ ਵਿੱਚ ਰਿਧਾਇਆ ਪਰਬ ਦੂਰ ਕਰਨਾ ਉਹਦਾ ਪਰਮ ਹੋਰ ਗਿਆਨ ਤੋਂ ਦੂਰ ਜਦ ਗਿਆਨ ਪੂਰਾ ਹੋ ਗਿਆ ਪਰ ਦੂਰ ਹੋ ਜਿੰਨਾ ਚਿਰ ਕਿਤੇ ਖੁੰਝੇ ਜਦੋਂ ਪਤਾ ਨਹੀਂ ਗਿਆ ਉਦੋਂ ਪਰ ਪਿਆ